ਤਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਅੰਨ ਦਿਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸੁਤ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਜਿਹਦੇ ਕਰਕੇ ਉਹਦਾ ਸਰੀਰ ਹਰਿਆ ਹੈ ਜਿਹਦੇ ਕਰਕੇ ਮੂਹ ਹਰਿਆ ਹੈ ਉਹਦੇ ਵਿੱਚ ਧੰਨ ਹੈ ਸਤਿਗੁਰ ਦੀ ਬਣੀ ਬਣੀ ਇਤੋਲੀ ਜਿਹਦੇ ਕਰਕੇ ਇਹਨਾਂ ਸ੍ਰਿਸ਼ਟੀ ਹਰੀ ਭਰੀ ਵਜ੍ਹਾ ਸਾਡਾ ਸਰਦਾਰ ਹਲਾ ਪੜਾ ਹੈ ਉਹਦੇ ਵਿੱਚ ਧੰਨ ਹੈ ਆਓ ਸ੍ਰਿਸ਼ਟੀ ਦਾੰਦ ਜੀ ਦਾ ਠੀਕ ਹੈ ਤੁਸੀਂ ਭਗਵਾਨ ਰਚਿਆ ਜੋਤਰਾ ਕੀ ਤਨ ਤੋਂ ਜਗ ਬਣਾਇਆ ਗੋਲ ਨਾ ਡੋਲੇ ਆਇਓ ਉਹ ਉਹਦੀ ਵੱਡੀ ਵੱਡੀ ਤਾਲੀ ਇਹ ਗਾਹ ਹਰ ਨਾਮ ਰਮਤ ਸੁਚ ਸੰਜਮ ਹਰ ਨਾਮ ਮੇਂ ਹੀ ਤ੍ਰਿਪਤਾਵੈ ਹਰ ਦਿਨ ਨਾਲ ਹੈ ਹਰ ਹਰ ਰੋਗ ਰੋਗ ਹੋ ਹੌਲੀ ਹੌਲੀ ਜਾਂਦੀ ਹੈ ਹਾਂ ਹਾਂ ਆਹ ਆ ਰੂਮ ਦੇ ਵਿੱਚ ਲੇਧ ਹੋਈ ਜਾਂਦਾ ਹੈ ਉਹ راہਤ ਸੁੱਤਿ ਸੰਜਮ ਸੱਚ ਜਾ ਉਹ ਇਹ ਸੱਚ ਸੱਚ ਉਹ ਸੱਚ ਵੀ ਇਹ ਹੈ ਸੱਚ ਵੀ ਉਹਦਾ ਇਹ ਹੌਲੀ ਹੌਲੀ ਹੌਲੀ ਹੌਲੀ ਆਰਾਮ ਦੇ ਵਿੱਚ ਰਬੀ ਜਾਂਦਾ ਸੱਚ ਹੋਈ ਜਾਂ ਨਾ ਬ੍ਰੋ ਸੱਚਿਆ ਉਹ ਉਹਦੇ ਵਿੱਚ ਲੀਡ ਹੋਈ ਜਾਂਦਾ ਮਨੋ ਤੋਂ ਇਟਾ ਨਾਲ ਜੇ ਕੋਈ ਖਤੋਪਿਆ ਉਹਨੂੰ ਤੇ ਖਰੀਦ ਕਰੀ ਜਾਂਦਾ ਹੀ ਤ੍ਰਿਪਤਾਵੈ ਹਰ ਜਿਹੜਾ ਹਜ਼ਾਰ ਨਾਲੇ ਤ੍ਰਿਪਤਾ ਹਰੂ ਤੇ ਹਰੂ ਵੀ ਰੂਪ ਹੈ ਹਰ ਜਿਹੜਾ ਹੈ ਹਰਦੀ ਹੈ ਹਰ ਵੀ ਕੈਸਾ ਹੋ ਜੀਓ ਹਰ ਵਿੱਚ ਸਮਾਰੇ ਜਿਸ ਕੁਮਾਰੇ ਜਿਸ ਕੁਲ ਹੈ ਠੀਕ ਹੈ ਜੀ ਹਰ ਦਾ ਗਿਆਨ ਪ੍ਰਾਪਤ ਕਰ ਰਿਹਾ ਹੈ ਕਿਉਂਕਿ ਉਹ ਦੇ ਵਿੱਚ ਸਮਾਰੇ ਠੀਕ ਹੈ ਜੀ ਹਰ ਨਾਮ ਤਾਣ ਹਰ ਨਾਮ ਦੀ ਹਰ ਨਾਮੋ ਰਖ ਕਰਾਵੇ ਹਰ ਨਾਮ ਹੈ ਤੁਮ੍ਹ ਸ਼ਕਤੀਏ ਸੰਰਾਜੇ ਕੋਈ ਅਲੂ ਦੀ ਸ਼ਕਤੀ ਹੈ ਤੁਮ੍ਹ ਆਰ ਨਾਮ ਦੇਵਾਨ ਆਰ ਨਾਮ ਦੇਵਾਨ ਦੇਵਾਨ ਜਿਹੜਾ ਰਾਜ ਕਰਦਾ ਕਚੈਰੀ ਹੈ ਜਿੱਥੇ ਉਹ ਆਪੋ ਚੱਲਦਾ ਵਾਟ ਦੇ ਇਹ ਜਵਾਨ ਹੈ ਇਹ ਸ਼ਕਤੀ ਹੈ ਹਰ ਨਾਮੋਂ ਰੱਖ ਕਰਾਵੇ ਹਰ ਲੋਕੋ ਪਤੰਗ ਦੁਆਰਾ ਰੱਖਿਆ ਕਰਦਾ ਸਰਬਜੀ ਅਰਾ ਖਤਰਾ ਦਾ ਰੱਖਿਆ ਕਰਦਾ ਜੋ ਲਾਏ ਪੂਜੇ ਗੁਰਮੂਰਤ ਮਨ ਇਛੇ ਫਲ ਪਾਵੈ ਜੋ ਚਿਤ ਲਾਏ ਪੂਜੇ ਗੁਰਮੂਰਤ ਮਾਇਆ ਦੇ ਵਿੱਚ ਕਿਤਕਾਸੰ ਦੇ ਹੈ ਜਾਂ ਤਾਂ ਰੂਹ ਚੱਲਦਾ ਹੈ ਤਾਂ ਚਿੱਤੇ ਦਾ ਸੁਭਾਅ ਦਾ ਚੱਲਦਾ ਇਹ ਕਿ ਜੇ ਬਾਹਰ ਚਿੱਤੇ ਐਸ ਲਿਵਟ ਜੇ ਪੂਜੇ ਦਾ ਚਿੱਤੇ ਜੇ ਬਾਹਰ ਵੱਲ ਨੂੰ ਪੈਸਾ ਪੂਜਾ ਕਰਦੇ ਸਰ ਹੋ ਜਵੇ ਉਹ ਸਾਬਦੇ ਉਜੇ ਗੁਰ ਬੋਲਤ ਤੋ ਆਂਖੇ ਫਲ ਪਾਵੇ ਫਲ ਪਾਵੇ ਉਹ ਵਾਂਣ ਜੋ ਇੱਛਾ ਹੁੰਦੀ ਹੈ ਉਹ ਫਲ ਕਰ ਕਰੇ ਬਾਰੇ ਚ ਫਲ ਪਾ ਜੇ ਸੁਰਿੰਦਰ ਹੋ ਜਵੇ ਜੇ ਗੁਰ ਦੇ ਚ ਚੱਲੇ ਦੋਨ ਦਸਰੇ ਸਤਗੁਰੂ ਪੂਰੇ ਕੀ ਬਹੋਤੇ ਹੁੰਦੇ ਜੇ ਚੱਲ ਜਿਵੇ ਜਦੋਂ ਉਹ ਪੂਰੇ ਦੇ ਦੁਦ੍ਹਾ ਘਰੇ ਜਨਕর্তਾ ਮਾਰ ਦਿਵਾਵੇ। ਜਨਕর্তਾ ਮਾਰ ਦਿਵਾਵੇ। ਐਸੇ ਤੋਂ ਉਹ ਮਾਰੇ ਬੈ ਜਿਹੜਾ ਨੂੰ ਹਾਂ ਹਾਂ। ਅਜੇ ਉਹ ਨਾਲ ਹੀ ਫਟਕਦਾ ਫਿਰ ਉਹ। ਠੀਕ ਹੈ। ਬਸ ਜਨਕর্তਾ ਕਰਤਾ ਪਰਮੇਸ਼ਰ ਦਾ ਪ੍ਰਤੀਕ ਹੈ ਜੀ। ਹਾਂ ਇਹ ਦਾ ਤਾਂ ਤੇ। ਜਦੋਂ ਪਰਮੇਸ਼ਰ ਉਹਨੂੰ ਹੈ। ਫਿਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਫਿਰ ਉਹ ਵੇਲਾ ਆਵੇ ਉਹ ਜਾਨ ਦਰਦੀ ਕਰਨ ਲੈ ਉਹ ਵੇਲਾ ਜਵਾਗਰ ਦੇ ਬੈਠਿਆ ਕਰਨ ਬੈਠਿਆ ਹੂੰ ਜਾਵੇ ਮੇਲਾ ਤਾਂ ਖਤਮ ਨਹੀਂ ਔਰ ਉਹ ਕੁਝ ਜੀ ਆਪੇ ਖਾਵੇ ਵਜੇ ਜੀ ਬਿਜੇ ਆਉਂਦੇ ਸੀਤਾ ਤੋਂ ਬੋਲਿਆ ਖਾਣਾ ਦੇਖੋ ਇੱਥੇ ਵੀ ਖਾਵਾਇ ਲੱਭਦਾ ਪਾਵੇ ਨਹੀਂ ਆਇਆ ਠੀਕ ਹੈ ਜੀ ਦੀ ਗਲਤੀ ਕਰਿਆ ਹੈ ਪ੍ਰਾਪਤੀ ਕਰਕੇ ਨਾ ਜ਼ਰੂਰੀ ਆਪਾਂ ਦੋਲੇ ਨੂੰ ਦੇ ਦਈਏ ਹਮ ਹਮ ਨੂੰ ਹਾਂਜੀ ਠੀਕ ਹੋ ਗਿਆ ਜੀ ਨਰਕ ਕੋਰ ਮੂੰਹ ਕਾਲੇ ਖੜਿਆ ਜੇ ਤਸਕਰ ਪਾਏ ਗਲਾਵੈ ਫਿਰ ਸਤਗੁਰ ਕੀ ਸ਼ਰਣੀ ਪਵੇ ਤਾਂ ਉਬਰ ਜਾ ਹਰ ਹਰ ਨਾਮ ਹੋ ਗਿਆ ਸੀ ਜੇਰਾ ਹੈ ਤਤੈ ਗੁਰਜਰ ਦੇ ਹੋ ਜਾਂਦੇ ਨੇ ਇਹ ਹੋ ਗਿਆ ਫਿਰ ਸਤਗੁਰ ਕੀ ਸ਼ਰਣੀ ਪਵੇ ਤਾਂ ਉੱਭਰੇ ਜੇ ਕਦੋਂ ਦੇਖ ਹਰ ਦੋ ਵੇ ਤਾਂ ਉੱਭਰੇ ਹੁਣ ਮੇ ਸਾਦੋ ਵੱਲੇ ਸਰ ਉਤੇ ਆਵੇ ਉਤੇ ਆਵੇ ਤੇ ਫੇਰ ਆਦਾ ਉਤੇ ਆਉਣਾ ਬਖਸ਼ਿਆ ਜਾ ਆਪਣੇ ਆਪ ਨੂੰ ਫੇਰ ਬਖਸ਼ਿਆ ਜਾ ਸਕਦਾ ਹੈ ਹਮਮ ਸ਼ਰਮ ਬਖਸ਼ੀ ਜਾ ਸਕਦੀ ਹੈ ਹਰ ਬਾਤਾਂ ਆਠ ਹਰ ਕਰਤੇ ਏਵੈ ਭਾਵ ਆਪੋ ਜੀ ਹੋਰੇ ਬਾਕੇ ਨਾਮ ਕਾਪੇ ਦੱਸਨੇ ਕੁਝ ਨਹੀਂ ਕਹਿ ਰਿਆ ਹਮਮ ਪਰ ਹਦੋ ਨੇ ਨਾਮ ਖਦੇ ਰਿਆ ਜੇ ਸੇਧੂ ਕੋਈ ਬੁੱਢੇ ਇਹੇ ਦੋੜ ਦੋ ਹਰ ਕਰਤੇ ਜਿਹੜਾ ਉੱਪਰ ਕਰਤਾ ਸੀ ਇਹਦੇ ਨਾਲ ਹਰ ਕਰਤਾ ਹੁਣ ਡਿਫਰੈਂਟ ਹੈ ਕੋਈ ਹੈ ਜੀ ਠੀਕ ਹੈ ਪਰ ਇਹ ਹੁਣ ਜਿਹੜਾ ਅਗਾਰ ਕਰਤਾ ਹੀ ਹੈ ਸਾਰੇ ਕਰਤੇ ਹਾਂ ਹਾਂ ਉਹ ਨਹੀਂ ਮਗਰ ਉਹਦੀ ਰਾਇ ਨਹੀਂ ਆਉਂਦੇ ਵਿੱਚ ਬਿਲਕੁਲ ਉਹਦੀ ਰਾਇ ਦਾ ਸਰੇ ਆਪਣੇ ਆਉਦੀ ਕੋਈ ਨਹੀਂ ਇਹ ਵਿੱਚ ਇਹ ਇਸ ਵਾਰ ਕੋਈ ਨਹੀਂ ਕਿ ਬਾਣੀ ਨੂੰ ਹੀ ਹਰ ਬਾਤਾਂ ਕਿਹਾ ਜਾਂਦਾ ਜੀ ਠੀਕ ਹੈ ਕੋਈ ਸਾਜਿਬ ਠੀਕ ਜੀ ਤੇ ਜਿਹੜੀ ਹਰ ਬਾਤ ਹੈ ਕਰਨਾ ਤੋਂ ਬਿਨਾਂ ਪੁੱਣ ਦੀ ਹੈ ਜੀ ਪਰ ਸਾਨੂੰ ਜੋ ਹੈ ਫਿਰ ਗੁਰਮੁਖੀ ਪਾਚਾਤ ਚ ਚੌਥੇ ਪਾਚਾ ਨੇ ਸੁਣਾਈ ਹੈ ਜੀ ਹਰ ਕੀ ਬਾਤਾਂ गोदरी है ठीक है वो तेरा भगवान हा बह है इधर आने कर वो रहा हूं जरा आप पर रोदा हूं ये दादरे वाला कर वो बारे दासरे मल्ला चौथा पूरे गुरका हुक्म ना मानना ਉਹ ਅੰਦਰ ਕੂੜ ਕੂੜੋ ਕਰ ਭੁੱਜੇ ਅਣ ਹੋਂਦੇ ਝਗੜੇ ਦਈ ਉੱਜਦੇ ਗਲ ਪਾਇ ਪੂਰੇ ਗੁਰ ਕਾ ਹੋ ਆਪਣਾ ਬੰਧ ਇਹਾ ਪੂਰੇ ਗੁਰ ਦਾ ਕੋਈ ਨਹੀਂ ਹੋਰਦਾ ਹਨ ਮਿਲਦਾ ਸੱਚੀ ਹੈ ਪਰ ਗੁਰ ਸਾਡੀ ਫਿਰ ਮਨ ਮੁਕ ਹੈ ਉਹ ਜਾਂਦੀ ਹੈ ਮਾਇਆ ਦਾ ਠੱਗਿਆ ਹੋਇਆ ਉਹ ਜਿਹਨੂੰ ਜੜ ਮਾਇਆ ਨੇ ਖਾਗ ਲਿਆ ਜੇਦਨ ਉਹ ਲਵੇ ਉਹ ਹੋ ਸਕਦਾ ਚੇਤਨ ਚੇਤਨ ਠਾਗ ਲਵੇ ਤਾਂ ਗੱਲ ਬਣਦੀ ਹੈ ਜੇਦਨ ਨੂੰ ਜੜ ਸਕਦਾ ਉਸ ਅੰਦਰ ਕੂੜ ਕੂੜੋਂ ਕਰ ਉਹ ਹੋਂਦੇ ਝਗੜੇ ਦਈ ਉਸਦੇ ਗਰ ਪਾਇਆ ਕੁਹਾਣੇ ਕੋੜ ਉਹਦੇ ਆਪਣੇ ਕੋੜ ਗੁੱਟੇ ਆਪਣੇ ਝੂੜ ਪ੍ਰਧਾਨ ਦੇ ਪਰਪੰਦਲ ਕੋਈ ਕਰੂ ਦੀ ਗੱਲ ਕੋਈ ਇਹ ਵੀ ਛੋਨੇ ਹੁੰਦੇ ਹੀ ਕਰਦਾ ਸੱਚ ਤੇ ਝੂਠਾ ਹੀ ਕਰਦਾ ਸੱਚੀ ਬੁੱਝਦੀ ਬੁੱਝਦਾ ਹੀ ਦੀ ਜੇ ਜਾ ਆਪਾ ਹੋ ਨੂੰ ये okay, बोलला ਦਈ ਅਖਰੇ ਪਰਮੇਸ਼ਰ ਯਾ ਮੂਲ ਵਾਸਤੇ ਆਉਂਦਾ ਜੀ ਅਣਹੋਂਦੇ ਝਗੜੇ ਦਈ ਉੱਦੈ ਗਲ ਪਾਇਆ ਹਾਂ ਪਰ ਮੇਰੀ ਬਾਤਾਂ ਚੱਲਣਾ ਫੇਰ ਠੀਕ ਹੈ ਸ਼ੋਅ ਲਈ ਦੋ ਕਰ ਉਹਦੇ ਅੱਛਾ ਇਹ ਦਈ ਪੜਾਂਗੇ ਆ ਹਾਂ ਜਈ ਬੜਕ ਠੀਕ ਹੈ ਕਬੋਧ ਹੋ ਵੀ ਕਬੋਧ ਗੱਲ ਪ੍ਰੋਸਤੀ ਕਰੇ ਬਹੁ ਤੇਰੀ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਡੈ ਜੂ ਰੰਨ ਦੁਹਾਗਣ ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਏ ओके ਜੀ ਜੀ ਠੀਕ ਹੈ ਹਰ ਬਰੁਸ਼ੀ ਬੱਲਾ ਫੇੜਦਾ ਉਹ ਵਿਆਦੀ ਹਲ ਕੋਣ ਹਰ ਬਰੁਸ਼ੀ ਕਰਦਾ ਇੱਕ ਫੇੜੇ ਤੇ ਦੇ ਦੇ ਕਰੇ ਗੱਲਾਂ ਬਲਵਾ ਦੀ ਪਰਸ਼ੀ ਉਹਦਾ ਯਕੀਨਮੰਦੀ ਕੋਈ ਕਰਦਾ ਇਹ ਗੱਲ ਹੈ ਜਿਵੇਂ ਕੋਈ ਕੋਈ ਲਾਈ ਕਰਦਾ ਯਕੀਨ ਕੋਈ ਕਰਦਾ ਨਹੀਂ ਉਹਦਾ ਹਰ ਬਰੁਸ਼ੀ ਜਾਨਾ ਕਰਦਾ ਸੱਲਾਹ ਨਾ ਹਟਿਆ ਇਹਾਂ ਦਾ ਇਹ ਜਿਹੜਾ ਦੋ ਬੋਲਿਆ ਕਿਸੇ ਨਾ ਪਾਇਆ ਕਿਸੇ ਨੂੰ ਨਹੀਂ ਜੱਟਾ ਰਿਹਾ ਬੋਲਿਆ ਕਿਸੇ ਦੀ ਤਸੱਲੀ ਉਹਦੀ ਕਰਾਰੇ ਉਹਦਾ ਬੋਲਿਆ ਠੀਕ ਹੈ ਉਹਦੀ ਗੱਲ ਤੇ ਕਿਸੇ ਤਰਸਦੀ ਨਹੀਂ ਜਿਆਦਾ ਜੀ ਨੇ ਦੁੱਧ ਪੀਤਾ ਇਹਨੇ ਬੋਲ ਤਾ ਕੋਣ ਨੂੰ ਲੋਕ ਮਗਨੇ ਹੋ ਲੋ ਲੋ ਉਹ ਕਾਕਾਰ ਹੰਡੇ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ ਪਸੇ ਦੁਹਾਗਣ ਜੇ ਮੈਂ ਹੋਰ ਤੋਂ ਘਰ ਤੇ ਹੁੰਦੀ ਹੈ ਖਜੂਰ ਦੀ ਬਸਾਰੀ ਹੋਈ ਜਿਉਂ ਕਾਕਾਰ ਹੰਡਾ ਫਿਰਦਾ ਦੁਹਾਗਣ ਤਾਂ ਗਿਆ ਸੱਚ ਖਜੂਰ ਨੂੰ ਟੁੱਟਿਆ ਹੋਇਆ ਉਹ ਸੱਚ ਸਮਾ ਦਾ ਖਸਮਾ ਖਸਮਾ ਹਰ ਤਰ੍ਹਾਂ ਦੇ ਮੋੜ-ਮੋੜਾਂ 'ਤੇ ਗੱਲਾਂ ਕਰਦਾ ਹੈ ਨਾSTRU ਉਹ ਘੇੜਾ ਪ੍ਰਚਾਰ ਕਰਦਾ ਹੈ ਕੋਈ ਨਹੀਂ ਹੁਸਨ ਦੀ ਗੱਲ ਉਹ ਤੇ ਹਾਂ ਕਰ ਲੈਂਦਾ ਜਾਣਦੇ ਨੇ ਸਾਰੇ ਸਵਾਲ ਜਦੇ ਕਰਦਾ ਵੀ ਜੁੱਸਦਾ ਹੈ ਜਦੋਂ ਕਰਦੇ ਨੇ ਸਤੋਤਾ ਹੈ ਹੀ ਨਹੀਂ ਗੱਲਾਂ ਵਿੱਚ ਸਾਰੀ ਲੈਵਲ ਦੀ ਹੀ ਕਰਦੀ ਇਹਦੇ ਤੁਹਾਡਾ ਗੁਰਮੁਖਿ ਹੋਏ ਤੋ ਅਲਿਖ ਤੋ ਵਰਤਾਇ ਪੋਰਸ ਦਾ ਪਾਸ ਗੁਰ ਪਾਸ ਬਹਿ ਜਾਇ ਜੇ ਕੋਈ ਗੁਰਮੁਖ ਬਹਿ ਜਵੇ ਉਹਨੂੰ ਗੁਰ ਹਰਿ ਹੋਇ ਅਲੰਕਾਰ ਜਿਹਾ ਲਵੇ ਲੱਗਦਾ ਦੇ ਦੱ ਵੇ ਗੁਰੂ ਜਾ ਕੇ ਬੈਠੇ ਉਹਦਾ ਗਾਜੀ ਉਹ ਕਹਿੰਦੇ ਉਹ ਕਹਿੰਦੇ ਪਿਆਰੀ ਜਾਂ ਬੋਲੀ ਜਾਂਦੇ ਠੁਕਿਆ ਨਾ ਕੋਈ ਨਹੀਂ ਕੀ ਕਰਦਾ ਕੋਜਾ ਪੇਜਾ ਕੋਜਾ ਆਪਣੇ ਕਿਰਤਾਂ ਦਾ ਬੀਰੋ ਜੇ ਉਹ ਗੁਰਗੋਪੇ ਆਪਣਾ ਤੋਂ ਭਲਾ ਨਹੀਂ ਪੰਚੋਂ ਲਾਹਾ ਮੂਲ ਸਭ ਗਵਾਇਆ ਉਹ ਜੇ ਧਿਆਨ ਵਿੱਚ ਹੈ ਉਹ ਸੱਚ ਦਾ ਉਹ ਲੋਕ ਉਹ ਬੈਠਾ ਦੱਸਦਾ ਜੀ ਆਪਣਾ ਆਪਣਾ ਗਿਆਨ ਵੀ ਲੋਕੋ ਦਾ ਉਹਨੂੰ ਸੱਚ ਦਾ ਪਤਾ ਸੋਪਾ ਨਾਲ ਨਹੀਂ ਲੋਪਾ ਆਦਮੀ ਖੁਦਾ ਹੀ ਨਹੀਂ ਨਾਲ ਨਹੀਂ ਬੱਚੋ ਕੋਲ ਸਭ ਗਵਾਇਆ ਐਸਾ ਅੱਜਿਓ ਐਸੇ ਕਰਦ ਕਰਦਾ ਹੂੰ ਤਾ ਹੋਰ ਨੇ ਕੋਲ ਗਿਆ ਤਾਂ ਮਰਾ ਤਾਂ ਮਾਰਿਆ ਵਾਲਾ ਯੋ ਜੇ ਸਾਚੀ ਨਹੀਂ ਕਰ ਲੂ ਕੋਈ ਵੀ ਜ਼ਿਆਦਗੀ ਜੂਗ ਜੋ ਗੁਰ ਗੋਪੇ ਤਾਂ ਆਪਣਾ ਵੀ ਅਪ ਗੁਪਤ ਰੱਖਦਾ ਹਮ ਗੋਪੇ ਲੋਪੇ ਰੱਖਦਾ ਐ ਫਸਰੋ ਉਹ ਨਹੀਂ ਕਹਿੰਦਾ ਸਾਡੀ ਜਾਣਦਾ ਹੈ ਜੇ ਨਾ ਚਾਹਦਾ ਉਹ ਨਹੀਂ ਕਹਦਾ ਸੀਗੇ ਇੱਕ ਗੋਪੇ ਆਪਣਾ ਤੇ ਲਗੋ ਰਿਆਰੀ ਮਤਲਬ ਉਹ ਬਸ ਦੇ ਗੇਟ ਹੈ। ਜੀ ਵੀ ਉਹ ਬੈਠਾ ਰਹੇ। ਕੋਈ ਮੋਬਾਈਲ ਠੀਕ ਹੈ ਜੀ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ। ਪਹਿਲਾ ਆਗਮ ਦੇ ਕੋ ਗੁਰ ਕਾ ਹਾਂ ਹਾਂ ਆ ਗੋ ਆ ਗਿਆ ਹਾਂ ਬਖਵਾਣ ਹੋਇਆ ਜਿਸ ਕਿਹਨਾਂ ਰੋਜ਼ ਤੋਂ ਪਹਿਲਾਂ ਆ ਕੇ ਤੁਹਾਨੂੰ ਸਹਾਇਆ ਹੈ ਕਿਹਾ ਹੈ ਆਪੋ ਬੋਲ ਭਾਈ ਜਿਹੜੇ ਕੂੜ ਕੱਟ ਕਰਦੇ ਝੂਲ ਨਾਰ ਹੂੰ ਇਸ ਗੈਲਿਸੇ ਦਾ ਗਿਆ ਰਹ ਜੋ ਉਹਨਾਂ ਲੋਕਾਂ ਦਾ ਨੇ ਕੀ ਕਾਹ ਚਾਹੀਦਾ ਉਹ ਬਹੁਤ ਦਾ ਗਿਆਨ ਅਸਲੀ ਗਿਆਨ ਕੀ ਹੈ ਉਹ ਜੋ ਘੌਣ ਦਾ ਗਿਆਨ ਹੈ ਇਹ ਤਾਂ ਪਹਿਲੀ ਸਟੇਜ ਹੈ ਗਿਆਨ ਇਹ ਸਭ ਚਾਹੀਦਾ ਸਾਡੇ ਅਭਰਾਤੀ ਦਿੱਤੇ ਕਹਿੰਦੀ ਬੜੀ ਦੀ ਲਿਸਤ ਸੀ ਅਭਰਾਤੀਆਂ ਹੈ ਬਾਹਰ ਤੋਂ ਰੂਪ ਇੱਥੇ ਬਚਨ ਉੱਪਰ ਆਇਆ ਪੂਰੇ ਵਰਤਾਜ ਬਚਨ ਉੱਪਰ ਆਇਆ ਪੂਰੇ ਵਰਤਾਜ ਬਚਨ ਉੱਪਰ ਆਇਆ ਪ੍ਰਗਟ ਹੋਇਆ ਪੂਰੇ ਵਰਤਾਜ ਬਚਨ ਆਪ ਦਾ ਵਿਗੜੇ ਹੋਏ ਨੇ ਤੁਹਾਨੂੰ ਹਰ ਦਿਨ ਤੇ ਇਹਨਾਂ ਦੀ ਗੱਲ ਨਹੀਂ ਸੁਣਦੀ ਉਪਰ ਜਿਸਕੇ ਅਲਲਦਾਰ ਦਾ ਨੂਰ ਉੱਪਰ ਕਰਤਾ ਵਜਲੂਰ ਨੇ ਉਹਨਾਂ ਦੇ ਟਿੱਪੜੀ ਕਰਤੀ ਉੱਪਰ ਆਇਆ ਉਹਨਾਂ ਦੇ ਟਿੱਪੜੀ ਕਰਤੇ ਉਹਨਾਂ ਦੇ ਜੋ ਉੱਤੇ ਲਾਗੂਗਾ ਇਹ ਠੀਕ ਹੈ ਜੀ ਗੁਰ ਸਿੱਖਾਂ ਵਡਿਆਈ ਭਾਵੇਂ ਗੁਰ ਪੂਰੇ ਕੀ ਮਨ ਮੁੱਖਾਂ ਉਹ ਵੇਲਾ ਹੱਥ ਨਾ ਆਯਾ ਗੁਰਸਤਾਨ ਦਾ ਪੂਰੇ ਜਗਤ ਦੀ ਵਡਿਆਈ ਹੀ ਚੰਗੀ ਲੱਗਦੀ ਹੈ ਪਉਦੀ ਹੈ ਜਸੂ ਦੇ ਜੀ ਮਨ ਮੁੱਖਾਂ ਉਹ ਜਾਂਦੇ ਦੀ ਬਹਿਰੇ ਸੁਣਦੇ ਦੀ ਚੰਗ ਕਰਦੇ ਦੀ ਚੰਗ ਕਰਦੇ ਦੀ ਤਵੇਲਾ ਕਿਦੋਂ ਕਿ ਕਿਸੇ ਤੋਂ ਮੈਂ ਸੁਣ ਲੈਦੇ ਆ ਵੀ ਹੋ ਜੀ ਦੇ ਬਿਸ਼ਰੂ ਜੀ ਦਾ ਕੌਣ ਹੋਜੂ ਸ਼ਿਵ ਜੀ ਦਾ ਕੌਣ ਹੋਜੂ ਹੈ ਕੋਈ ਠੀਕ ਹੈ ਉਹ ਵਿਸ਼ਵਾਸ ਦੀ ਕਰਦੇ ਬਲ ਬੁਖਾਣੇ ਹੂੰ ਭਾਜੇ ਕੋਣ ਉਹ ਸਤ ਸਤ ਕਰਕੇ ਬੋਲਦੇ ਨਹੀਂ ਕੋਈ ਬੋਲ ਨਹੀਂ ਰੋਹਾਰਾ ਰਹਿਣੇ ਪੌੜੀ ਸੱਚ ਸੱਚ ਸਭ ਤੋਂ ਵੱਡਾ ਹੈ ਸੁਰ ਲਈ ਜਿਸ ਸਤਗੁਰ ਟਿਕੇ ਜੇ ਸੱਚ ਧਿਆਨ ਦਾ ਸੱਚ ਸੱਚਾ ਸਤਗੁਰ ਇੱਕੇ ਸੱਚ ਸੱਚਾ ਸਭ ਤੋਂ ਵੱਡਾ ਹੈ ਜਿਹੜਾ ਸੱਚ ਹੈ ਇਸ ਪਾਸੇ ਤੇਰੀ ਜੇ ਪਾਸੇ ਦੀ ਅਸਾਂ ਚੱਲ ਸੱਚਾ ਦੋਹਰੇ ਰਕੇ ਤੋਂ ਚੱਲ ਅੱਜੋ ਤਾਂ ਸੰਤ ਜਨਾ ਮਿਲ ਹਾਜ਼ਰ ਆਇਆ ਇਹਦੇ ਵੱਡਾ ਕੋਈ ਨਹੀਂ ਸੰਤਾਲ ਦੇ ਵਿੱਚ ਹਾਂ ਪਰ ਜਨਾ ਜਨਾ ਤੋਂ ਕੀਪਾ ਬਣਦਾ ਜਨਾ ਤਾਂ ਹੁੰਦੇ ਸੰਤ ਜਨਾ ਮਿਲ ਸਾਰਾ ਹਾਜ਼ਰ ਸੱਚੇ ਸੱਚ ਸੱਚ ਹੂੰ ਸੱਚਾ ਮਨ ਕੇ ਦਾਰੇ ਸੱਚ ਨਾਲ ਜੁੜ ਕੇ ਸੱਚੇ ਮਨ ਕੇ ਦਾਰੇ ਸੱਚ ਚਿੱਤ ਤੇ ਸੱਚਾ ਜਿਹੜਾ ਹੈਗਾ ਸੱਚਾਰਾ ਮਨ ਹੋ ਗਿਆ ਹੈ ਹੋ ਗਿਆ ਠੀਕ ਹੈ ਕੋਈ ਨਹੀਂ ਇਹ ਜਿਹੜੀ ਆਪਸ ਇਹਨਾਂ ਦੀ ਯੂਨੀਅਨ ਹੈ ਇਹਨਾਂ ਦੀ ਏਕਤਾ ਹੈ ਸਭ ਤੋਂ ਵੱਡੀ ਟਿੱਕੇ ਸਭ ਤੋਂ ਵੱਡਾ ਹੈ ਉਹ ਲਈ ਜਿਸ ਸਤਗੁਰ ਟਿੱਕੇ ਜਿਹਦੇ ਅੰਦਰ ਸਤਗੁਰ ਦਾ ਗਿਆਨ ਟਿੱਕ ਜਵੇਗਾ ਟਿੱਕ ਜਵੇ ਸਤਗੁਰ ਦਾ ਗਿਆਨ ਟਿੱਕ ਆਮ ਗਲਤੀ ਨਾਲ ਲੋਕ ਟਿੱਕੇ ਬੜਦੇ ਆ ਵੀ ਮੱਥੇ ਕੋਈ ਟਿੱਕਾ ਲਾਇਆ ਹੋਵੇ ਕੀ ਤੇ ਰਹਿ ਰਿਹਾ ਹੈ ਉਹਦਾ ਹਾਂਜੀ ਪਰ ਇੱਥੇ ਤਾਂ ਤਾਂ ਆਪ ਲੱਗਦਾ ਕਿ ਹੋ ਗਿਆ ਹੋ ਗਿਆ ਠੀਕ ਹੈ ਠੀਕ ਜਾਣਦਾ ਕਾ ਹੋ ਜਾਣਾ ਠੀਕ ਹੈ ਤੋਂ ਸਤਗੁਰ ਧਿਆਨ ਸਾਕੇ ਨਾਲ ਜੁੜਿਆ ਹੋਇਆ ਜਿਹੜਾ ਹਰ ਰੋਜ਼ ਸੱਚ ਧਿਆਨ ਕਰਦਾ ਹੈ ਹੋਰ فرق نہیں ہوندا اکو اساں دی ایس نبر دی ملتاں کسات گل ہے چاہے اندر دے ساتھ گل ہے چاہے کبیر ساتھ گل ہے چاہے رام دے ساتھ گل ہے اور ان وچ فرق نہیں ہوندا ویکھے ہندے انہاں ਕੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਾਰ ਛਿੱਕੇ ਸੋਏ ਸਤੁਰ ਪੁਰਖ ਸਤੂ ਨੂੰ ਮੁਰ ਪੁਰ ਕੋਈ ਹੈ ਜਿਹਦੇ ਪੰਜੇ ਦੂਤ ਮਨ ਦੇ ਛਿੱਕੇ ਦੇ ਭਜਾਤੇ ਜਿਹਦੇ ਦੂਤ ਜਿੰਨਾ ਕੋਈ ਦੂਨ ਪੰਜਾਬ ਤੇ ਕੋਈ ਹੋਰ ਕੋਸਤਾ ਹੋਗੀ ਬਸਾਰ ਨਹੀਂ ਛੋੜੀ ਆਪਣੇ ਆਪ ਦੀ ਪੂਜਾ ਕਰਉਂਦੇ ਦੇ ਆਪਣੇ ਆਪ ਨੂੰ ਮੋੜਾ ਪਾਉਂਦੇ ਰਹੇ ਦੇ ਪਤਾ ਕਦਾ ਨਹੀਂ ਜੀ ਸੰਤਬੰਧੇ ਹੀ ਆਈਏ ਆਪਣਾ ਗੂੜੇ ਕਰਾਂ ਮੇਰੇ ਰਹਿਦੇ ਅੰਦਰ ਕੂਰ ਫਿੱਟ ਫਿੱਟ ਹੂੰ ਖੱਤੇ ਬਾੜੀ ਪਦੋਂੋਂ ਖਟਕਾਰਾਂ ਪੈਂਦੀ ਹੀਲ ਜਾ ਕੇ ਸੱਚ ਨਾਲ ਜੁੜ ਪਾਲਣ ਹੂੰ ਨਾਲਾ ਤੇ ਫਟਕਾਰਾਂ ਨੇ ਅੱਗੇ ਕਿਉਂ ਨਾਲੇ ਨੂਰ ਦੇ ਵਿੱਚ ਫਿੱਟੇ ਉਹਨਾਂ ਦੇ ਬੁੱਲੇ ਵਿਚੋਂ ਰੂਪ ਨਿਕਲਦਾ ਬਿਚਾ ਉਹ ਤਾਂ ਫਿੱਟੇ ਬੋਲਣ ਲੈ ਠੀਕ ਹੈ ਫਿੱਟੇ ਬੋਲਣ ਬੋਲਣ ਵਾਲੇ ਬੋਲ ਬੋਲਣ ਵਾਲੇ ਬਣ ਕੇ ਤਾਂ ਫੇਰ ਨਾਲੇ ਮੈੜੀਆਂ ਨੂੰ ਹੋਰ ਕੀ ਕਰਨੀ ਫਟਕਾਣ ਦੇ ਭਾਗੀ ਇੱਥੇ ਦੁਨੀਆ ਜਿੱਦੀ ਵਾ ਕੁਝੀ ਦਿੱਕਤ ਨਹੀਂ ਜੀ ਇੱਥੇ ਕੋਈ ਨਹੀਂ ਪੁੱਛਦਾ ਅਸੀਂ ਕੀ ਆਲੂ ਨੂੰ ਨਹੀਂ ਕਰਦੇ ਓਏ ਬੋਲਣ ਕਿਸੇ ਨਾ ਭਾਵਨੀ ਮੂੰ ਕਾਲੇ ਛਤਗੁਰ ਤੇ ਚੁੱਕੇ ਓ ਬੋਲੇ ਕਿਸੇ ਨਾ ਬਾਗਲੀ ਉਹ ਜਿਹੜਾ ਕੋਈ ਮੁੰਨੇ ਦੇ ਕਿਸੇ ਨੂੰ ਨਹੀਂ ਚੰਗਾ ਲੱਗਣਾ ਕਿਸੇ ਨੂੰ ਨਹੀਂ ਪਉਦਾ ਸਾਧੂਰ ਤੋਂ ਚੁੱਕੇ ਸਾਧੂਰ ਜੁੜੀ ਜੋੜੂ ਲੋਇਆ ਤੂੰ ਕਾਣੇ ਖੜਾ ਬੈਠੇ ਉਹ ਕਾਲੇ ਮੂੰਹ ਵਾਲੇ ਸੱਚ ਸਮਝੋ ਨਹੀਂ ਲੈ ਨਹੀਂ ਕਹਿ ਸਕਦੇ ਅਭੂ ਚੇਲੇ ਨੂੰ ਮਿਲੂ ਦਾ ਕਹੂੰ ਸੁਣਾ ਤੋ ਕੋਲ ਕੁਛ ਨਹੀਂ ਇਹ ਸਮਝੋ ਨਹੀਂ ਲੈ ਨਹੀਂ ਕਹਿ ਸਕਦੇ ਕਾਹਦੀ ਬੋਲ ਸਕਦੇ ਮੁਤਵੀ ਉਠਾ ਸਕਦੇ ਗਲਤ ਹੈ ਅਪਰਾਧੀ ਵਰਦ